ਸ਼ਲੋਕ ਮਾਲਾ ਤੀਜਾ ਮਨਮੁਖ ਵਪਾਰੈ ਸਾਰ ਨਾ ਜਾਣਨੀ ਵਿਖ ਵਿਹਾਜੈ ਵਿਖ ਸੰਗਰੈ ਵਿਖਸਿਓ ਧਰੈ ਪਿਆਰ ਮਨਮੁਖ ਜਿਹੜੇ ਨੇ ਵਪਾਰੈ ਸਾਰ ਨਾ ਜਾਣਨੀ ਵਪਾਰ ਕਿਵੇਂ ਕਰਨਾ ਕਿੱਥੇ ਖਬਰ ਨਹੀਂ ਮਨਮੁਖ ਨੂੰ ਵੇਖ ਆਇਆ ਦਾ ਵਪਾਰ ਕਰਦੇ ਨੇ ਵੇਖੇ ਖਰੀਦਦੇ ਨੇ ਵੇਖੇ ਇਕੱਠੀ ਕਰਦੇ ਨੇ ਦੇਖਣ ਵਾਲੇ ਉਹਨਾਂ ਦਾ ਪਿਆਰ ਹੈ ਮੂਰਖ ਗਵਾਰ ਬਾਹਰੋਂ ਨੇ ਵਿਦਵਾਨ ਪੰਡਿਤ ਅਸਲ ਦੇ ਵਿੱਚ ਮਨ ਕਰਕੇ ਉਹ ਮੂਰਖ ਗਵਾਰ ਦੇ huzoor ਵਾਦੀ ਕਰਨ ਪਿਆਰ ਹਰ ਦੇ ਨਾਲ ਚਿੱਤ ਤਾਂ ਲਾਉਂਦੇ ਨਹੀਂ ਚਿੱਤ ਨਹੀਂ ਉਹ ਹਾਲਾਣਾ ਛੁੱਟਦਾ ਉਹ ਹੋਂ ਨਾਲ ਬਾਦ-ਬਾਦ ਬਥੇਰਾ ਕਰਦੇ ਨੇ ਬਾਦੀ ਨੇ ਬਾਦ-ਬਾਦ ਕਰਦੇ ਨੇ ਜਿਤਾਉਂਦੇ ਨੇ ਪਿਆਰ ਕਰਉਂਦੇ ਨੇ ਹੈ ਦੀ ਉਤਰਉਂਦੀ ਹੈ ਪਿਆਰ ਵਾਅਦਾ ਕੀਆ ਕਹਾਣੀਆਂ ਕੂੜ ਬੋਲ ਕਰੇ ਆਹਰ ਬਾਦ-ਬਾਦਿਆਂ ਕਹਾਣੀਆਂ ਕਰਦੇ ਨੇ ਸਭ ਬਾਦ-ਬਾਦ ਦੇ ਪਿਛੇ ਦੀ ਇਹਨਾਂ ਬੋਲਦੇ ਨੇ ਵਾਦਾਂ ਗਿਆ ਗੱਲ ਨਾ ਕੂੜ ਬੋਲ ਬੋਲ ਕਰਨਾ ਹਰ ਬੋਲ ਕੇ ਰੋਟੀ ਖਾਂਦੇ ਨੇ ਝੂੜ ਚਾ ਰੋਟੀ ਖਾਂਦੇ ਨੇ ਝੂੜ ਬੋਲ ਬੋਲ ਕੇ ਅਜਨੇ ਵਿਦਵਾਨ ਨੇ ਇਹ ਝੂੜ ਤਾਂ ਰੋਟੀ ਚੱਲਦੀ ਹੈ ਇਹਨਾਂ ਦੀ ਟੁੱਟੀ ਰੋਟੀ ਹੈ ਝੂੜ ਤੋਂ ਜਗ ਮਹਿ ਰਾਮ ਨਾਮ ਹਰ ਨਿਰਮਲਾ ਹੋਰ ਮੈਲਾ ਸਭ ਆਕਾਰ ਸੰਸਾਰ ਦੇ ਵਿੱਚ ਰਾਮ ਨਾਮ ਸਿਰਫ ਧਰਮਲਾ ਹੈ ਬਾਕੀ ਤੁਰਿਆ ਤਾਂ ਹੈ ਤੇ ਸਾਰਾ ਸੰਸਾਰ ਦਾ ਸਭ ਕੁਝ ਮੈਲਾ ਹੈ ਸੰਸਾਰ ਦੇ ਵਿੱਚ ਸਭ ਕੁਝ ਮੈਲਾ ਹੈ ਆਪਨਾਮ ਨੂੰ ਛੱਡ ਕੇ RAMਨਾਮ ਨਰਬਲ ਹੈ ਬਾਕੀ ਸੰਸਾਰ ਦੇ ਵਿੱਚ ਸਭ ਕੁਝ ਨਾਮ ਹਰ ਨਿਰਮਲ ਹਰ ਇਹ RAMਨਾਮ ਹੀ ਕੋਗਲ ਹੈ ਅੱਛਾ ਜੀ ਤੇ ਇਹ ਜੋਤ ਦੀ ਗੱਲ ਹੈ ਜੀ ਹਾਂ ਆ ਉਹ ਹਰ ਵੀ ਉਸ ਨੂੰ ਕਿ ਹਰ ਵੀ ਉਸ ਨੂੰ ਕਿ ਠੀਕ ਹੈ ਜੀ ਬਾਕੀ ਜਿੰਨੀ ਮਾਇਆ ਹੈ ਸਭ ਹੋਈ ਹੈ ਨਾਨਕ ਨਾਮ ਨਾ ਚੇਤਨੀ ਹੋਏ ਮੈਲੇ ਮਰੇਗਾ ਵਾਰ ਨਾਨਕ ਕਹਿੰਦਾ ਜੀ ਨਾਮ ਪ੍ਰਤੀ ਜਿਹੜੇ ਚੇਤਨੀ ਹੋਏ ਜਿਹਨਾਂ ਨੇ ਨਾਮ ਨੂੰ ਵਝਿਆ ਹੀ ਦੀ ਸਮਝਿਆ ਹੀ ਦੀ ਨਾਮ ਨਾ ਚੇਤਨੀ ਹੋਰ ਮੈਲੇ ਹੋਗੇ ਸਭਾ ਔਰ ਮੈਲੇ ਹੋਗੇ ਮਰਦ ਕੇ ਹੋਰ ਬਲੀਦਾਂ ਲੈ ਜਾਣਗੇ ਇਥੋਂ ਖੱਟ ਕੇ ਠੀਕ ਹੈ ਜੀ ਗਿਆਨਵਾਨ ਨਹੀਂ ਹੋਏ ਗਵਾਰ ਦੇ ਗਵਾਰ ਚਲੇ ਗਏ ਹਾਂ ਜੀ ਉਹ ਹੋਰ ਲੈ ਕੇ ਚਲੇ ਗਏ ਪਰ ਹੋਰ ਪਾਲ ਕੇ ਚਲੇ ਗਏ ਇਥੋਂ ਓਏ ਮੈਲੇ ਮਰੰਗਵਾਰ ਮਹੱਲਾ ਤੀਜਾ ਦੁੱਖ ਲੱਗਾ ਬਿਨ ਸੇਵੀਐ ਹੁਕਮ ਮੰਨੇ ਦੁੱਖ ਜਾਏ ਆਪੇ ਦਾਤਾ ਸੁਖੈ ਦਾ ਆਪੇ ਦੇ ਸਜਾਈ ਜਿਹਨੂੰ ਜੈਵਾ ਤੇ ਸ਼ਬਦ ਵਿਚਾਰ ਤੇ ਬਿਦੂਆ ਦੁੱਖੇ ਲਗੂਗਾ ਦੁਖ ਲਗਾ ਬਿਨ ਸੇਵੀਐ ਜਿਹਨੂੰ ਸ਼ਬਦ ਵਿਚਾਰਿਆ ਦੀ ਜਿਹਨੂੰ ਗੁਰਬਾਣੀ ਦੀ ਵਿਚਾਰੀ ਉਹਨੂੰ ਦੁੱਖੇ ਲੱਗਣਾ ਮੈਨੂੰ ਸਿੱਖੀ ਆ ਹਾਂਜੀ ਹੁਕਮ ਮੰਨੇ ਦੁੱਖ ਜਾਏ ਹੁਕਮ ਨਾ ਮੰਨ ਲਵੇ ਤੇ ਦੁੱਖ ਚਲਾ ਜਾਂਦਾ ਪਾਣੀ ਚ ਰਹੇ ਤਾਂ ਚਲਾ ਜਾਂਦਾ ਹੁਕਮ ਜਾਏ ਸੋ ਜੀ ਆਪੇ ਦਾਤਾ ਸੁੱਖੇ ਦਾ ਆਪੇ ਦੇ ਸਜਾਏ ਸੁੱਖਾ ਦੇਣ ਵਾਲਾ ਦਾਤਾ ਵੀ ਆਪੇ ਆਪਣੇ ਆਪ ਨੂੰ ਆਪੇ ਤੇ ਸਜਾਏ ਆਪੇ ਆਪਣੇ ਆਪ ਨੂੰ ਸਜਾ ਜਾਂਦਾ ਬਾਹਰ ਕੋ ਵਾਲਾ ਲੈਂਦਾ ਉਹ ਕੰਮ ਕਰਦਾ ਆਪਣੇ ਆਪ ਨੂੰ ਸਜਾ ਦੇ ਲੈਂਦਾ ਇਹ ਗੁਰੂ ਵੀ ਗੱਲ ਮੰਨ ਲੈਂਦਾ ਤਾਂ ਸੁਖ ਪੈਦਾ ਕਰ ਲੈਂਦਾ ਇਹ ਆਪੇ ਕਰਦਾ ਜੀਵ ਕੋਈ ਨਹੀਂ ਕਰਦਾ ਇਹ ਜਿੰਦਰੇ ਦੀ ਮਰਜ਼ੀ ਚਲਾ ਜਾਂਦਾ ਢੇਲ ਦੇ ਕਪੜੇ ਕੜਾਏ ਜੀ ਛਾਲ ਜਾਣ ਕੇ ਬਰਫ਼ ਦੇ ਘਾਹ ਵੀ ਆਪਣੇ ਆਪ ਵੜ ਜਾਂਦਾ ਇਹ ਗ્ઞਾਨਿਕ ਇਹ ਵੇ ਕਿਸੇ ਰਜਾਈ ਨਾਨਕ ਕਹਿੰਦਾ ਵੰ ਰਜਾ ਕੇ ਆਪਣੀ ਮਰਜ਼ੀ ਨਾਲ ਇਹ ਆਪਣੀ ਮਰਜ਼ੀ ਨਾਲ ਉੱਥੇ ਏ ਵੀ ਰਾਜਈਆ ਜਦੋਂ ਬੰਦੀ ਚਲਾ ਜਾਵੇ ਪ੍ਰਵੇਸ਼ਣ ਦੇ ਤਾਂ ਇਹਨੂੰ ਦੱਸਦਾ ਜੀ ਕੋੜੀ ਹਰ ਨਾਮ ਬਿਨਾ ਜਗਤ ਹੈ ਨਿਰਤਨ ਬਿਨ ਨਾਮ ਹੈ ਤ੍ਰਿਪਤੀ ਨਹੀਂ ਦਰਦਾਂ ਨਾਮ ਤੇ ਬਿਨਾ ਸਾਰੇ ਨਿਰਤਨ ਜਗਦਾ ਹੈ ਨਿਰਤਨ ਹੂੰ ਬਿਨ नाम है तृप्ति नाही नाम तो बिना तृप्ति नहीं हो सकती ठीक है जी बाकी जेड़ा माया इनू इनू है इनु ਬਾਣੀ ਹੈ ਜੀ ਹੋਜੀ ਜੀ ਤਾਂ ਇਹ ਕਹਿੰਦੇ कच्चा ਧੰਨ ਮੂਰਖ ਗਾਵਾਰ ਬਿਲਕੁਲ ਬਿਲਕੁਲ ਦੂਜੇ ਪਰ ਭੁਲਾਇਆ ਹੋਮੈ दुख पाही ਦੂਜੇ ਪਰ ਭੁਲਾਇਆ ਹੋਮੈ दुख पाही ਦੂਜਾ ਸ਼ਰੀਰ ਹੈ ਨਾ ਬਾਹਰਲਾ ਜੁੜਿਆ ਹੋਇਆ ਮਨ ਨਗਰਕਾਰ ਕੇ ਬਾਲੇ ਕੀਦੀ ਪਰ ਭਲਾਤਾ ਕੋਮੇ ਦੇ ਵਿੱਚੋਂ ਦੁੱਖ ਪੌਂਦਾ ਫਿਰਦਾ ਮੈਂ ਐ ਕਰ ਸਕਦਾ ਉਹ ਉਹ ਕਰ ਸਕਦਾ ਮੈਂ ਕਰਨਾ ਚਾਹੀਦਾ ਮੈਨੂੰ ਉਹ ਕਰਨਾ ਚਾਹੀਦਾ ਹੁਣ ਦੁੱਖ ਪੌਂਦਾ ਹਾਂਜੀ ਬਿਨ ਕਰਮਾ ਕਿਛੂ ਨਾ ਲੋਚਾਹੀ ਕਰਮਾ ਦੇ ਬਿਨਾ ਕੁਛ ਨਹੀਂ ਮਿਲਦਾ ਜੇ ਨਾ ਕੋਈ ਤਰੇ ਅਲਗ-ਅਲਗ ਹੋਵੇ ਦੁਨੀਆ 'ਚ ਮਾਇਆ ਬਥੇਰੀਆ ਪਰ ਤੈਨੂੰ ਉਹਦੀ ਮਿਲਣੀ ਜੇ ਤੇਰੇ ਕਰਮਾਂ 'ਚ ਪਰ ਜਿਆਦੇ ਵਿੱਚ ਪਦਾਰਥ ਵਧਾ ਦੇਣੇ ਤੈਨੂੰ ਤੇਰੇ ਉਹੀ ਰਾਣੇ ਮਿਲਣੇ ਨੇ ਭਾਜੇ ਤੇ ਜੇ ਬਹੁਤ ਲੋ ਚਾਹੀਂ ਆਵੇਂ ਜਿੰਨਾ ਮਰਜੀ ਲੋਜਦਾਰ ਆਇ ਇਛਾ ਰੱਖੋ ਤਾਂ ਛੁਟਾਹੀ ਔਰ ਬਣਿਆ ਰਹਿੰਦਾ ਜਿੰਨਾ ਚਿਰ ਗੁਰ ਸ਼ਬਦ ਆਪਦੇਸ਼ ਬਾਣੀ ਦੀ ਫਮਿੰਦਾ ਬਾਣੀ ਨੀ ਮੰਦਾ ਬਰਬਾਣੀ ਦੀ ਸਮੀਦਾ ਪਰਦਾ ਬੰਦਾ ਹੋਰ ਨਾ ਜਰ ਆਉਣ ਜਾਣ ਦੀ ਛੋੜਦਾ ਇਹਦਾ ਕੰਮ ਨਾ ਬੰਦਾ ਆਪ ਕਰੇ ਕਿਸ ਆਖੀ ਹੈ ਦੂਜਾ ਕੋ ਨਹੀਂ ਆਪ ਕਰੇ ਜਿਹਾ ਆਪੇ ਕਰਦਾ ਹੈ ਕਿਰੂ ਗਈ ਹੈ ਦੂਜਾ ਦੀ ਕੋਈ ਗਲਤੀ ਦੀ ਕਿ ਕਿ ਜੀਵ ਦੀ ਗੱਲ ਹੋ ਰਹੀ ਹੈ ਮਨ ਦੀ ਗੱਲ ਹੋ ਰਹੀ ਹੈ ਜੀ ਯੂਰ ਵੀ ਗੱਲ ਹੈ ਜੀ ਜੀਵ ਦੀ ਇੱਕ ਦੀ ਪੂਰੇ ਦੀ ਠੀਕ ਹੈ ਜੀ ਮਾਤਾ ਉਹਦਾ ਹੀ ਜੀ ਠੀਕ ਦੋ ਵਾਰ ਇਹੀ ਗੱਲ ਆ ਗਈ ਕਿ ਇਹ ਆਪਣੀ ਗਲਤੀ ਕਰਕੇ ਇੱਥੇ ਆਇਆ ਹੋਇਆ ਹੈ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਇੱਥੇ 16ਵੀਂ ਪੌੜੀ ਸਮਾਪਤੀ ਜੀ ਹਾਂ